ਕੁਤਬ ਸ਼ਲੋਕ ਉਤਮ ਸੇਖ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਉਹ ਸਭ ਸ਼ਲੋਕ ਸਾਧਕੇ ਬਚਨ ਸਾਧ ਸਾਧਕੇ ਬਚਨ ਜਦੋਂ ਸਾਧ ਜਾਂਦਾ ਹੈ ਸਾਧ ਜਾਂਦਾ ਉਹ ਪਤਾ ਲੱਗਦਾ ਸਮਝ ਆ ਜਾਂਦੀ ਹੈ ਸਭ ਨੂੰ ਸੁਭਿਆਗ ਬੋਲਦਾ ਜੋ ਪੁੱਛਿਆ ਉਹ ਬਚੂਤੀ ਵਸਤਾ ਦੀ ਗੱਲ ਹੁੰਦੀ ਉਹ ਸ਼ਲੋਕ ਉਹ ਦਨੇ जो उपदेश है वो तो गल है वो उच्च कम कोल्टे भी तो ऊंची कोल्टे भी गल नहीं है ओ तो ऊपर कुछ भी होता गुरुवाणी देले श्लोक नहीं गुरुवाणी है जी गुरुवाणी सारे वैसे जोक है श्लोक जो हम बोल रहे हैं वो श्लोक है गाना है ये गुरुवाणी तो ऊपर कोई भी हो ਉਪਦੇਸ਼ ਵੀ ਇਹ ਸਾਧ ਕੇ ਵਿੱਚ ਸਾਧ ਉਹ ਹੈ ਜਿਹੜਾ ਇਸ ਸਟੈਂਡਰਡ ਦੀ ਗੱਲ ਕਰ ਸਕੇ ਇਸ ਸਟੈਂਡਰਡ ਦਾ ਉਪਦੇਸ਼ ਦੇ ਸਕੇ ਉਹ ਸਾਧ ਉਹਦੇ ਭੇਤ ਦੀ ਗੱਲ ਜਿਹੜੀ ਹੈ ਕਿਹਾ ਜਾਊਗਾ ਉਹਦਾ ਕੋਈ ਮਤਲਬ ਨਹੀਂ ਭੇਤ ਦਾ ਨਾਲ ਕੋਈ ਮਤਲਬ ਨਹੀਂ ਕਿਉਂਕਿ ਬੋਲਣਾ ਆਤਮਾ ਦੇ ਆਤਮਾ ਦੀ ਅਵਸਥਾ ਦੀ ਗੱਲ ਆਤਮਿਕ ਅਵਸਥਾ ਦੀ ਗੱਲ ਹੈ ਨਾ ਕਿ ਬਾਹਲੇ ਸ਼ਰੀਰ ਦੇ ਦੇਖਦੀ ਗੱਲ ਹੈ ਇਹ ਸ਼ਰੀਰ ਦੀ ਉਮਰ ਦੀ ਗੱਲ ਹੈ ਉਮਰ ਵੀ ਜਦਨੇ ਵੱਡੀ ਹੋਵੇ ਘੱਟ ਹੋ ਵੱਧ ਹੋ ਗਈ ਭਾਵੇਂ ਉਮਰ ਘੱਟ ਵੀ ਹੋਈ ਜਾ ਵੱਧ ਵੀ ਹੋਈ ਜਾ ਜਦੋਂ ਮਰਦਾ ਸੀ ਉਹ ਤਾਂ ਹਰ ਨਹੀਂ ਸੀ ਸਹੀ ਤਾਂ ਸੰਗੋੜ ਜਦ ਉਸ ਤੋਂ ਗਹਾਂ ਜਦ ਹੋਸ਼ਾਂੇ ਹੋਗੇ ਉਹ ਤਾਂ ਉਹਨਾਂ ਨੂੰ ਸਮਝ ਆ ਗਿਆ ਗੁਰੂ ਅਮਰਦਾਸ ਵੀ ਉਹਨਾਂ ਦੇ ਵਿੱਚ ਹੀ ਦਿਸ ਕੋਈ ਅੰਕਤ ਦੇ ਵਿੱਚ ਹੀ ਦਿਸ ਜਾਂ ਸਾਡੇ ਕੋਲ ਰਿਕਾਰਡ ਦੇ ਵਿੱਚ ਤਰਵੀਰ ਵੀ ਉਹਨਾਂ ਦੇ ਵਿੱਚ ਹੀ ਆ ਬਾਕੀ ਸਾਰੇ ਭਗਤ ਤਕਰੀਬਨ ਬਚਪਨ ਤੋਂ ਕੋਈ ਪੁੱਤ ਨਹੀਂ ਪੈਦਾ ਹੋਇਆ ਸੀ ਜਿਹੜੇ ਸਾਡੇ ਕੋਲ ਸੀਦੇ ਜੀ ਪੁੱਤ ਨੇ ਕੁਰਬਾਨੀ ਚੋਇ ਕੋਈ ਬਚਪਨ ਤੋਂ ਭਗਤ ਹੋਇਆ ਉਹ ਇਹਨਾਂ ਚੇਰੀ ਆ ਗੁਰੂ ਘਰ ਚਾਹੇ ਕੋਲ ਉਹਨੂੰ ਸੰਗਤ ਬੈਠਣ ਤੇ ਮਿਲ ਗਈ पहला ਗੁਰਬਾਣੀ ਦਾ प्रचार है ਜੀ ਤੁਮਾ ਦਾ प्रचार ਸੀ ਉਦੋਂ ਬਚਪਨ ਤੋਂ ਬਚਪਨ ਹਮ ਗੜਾ ਬਚਪਨ ਦਾ ਨਹੀਂ ਸੀ ਕੋਲ ਜੰਮਦਾ ਬਚਾ ਨੂੰ ਜੇ ਇਹ ਹੀ ਗੱਲ ਅਸੀਂ ਪੜਾਈਏ ਸੋ ਨਾਮ ਛੇ ਦੀ ਸਮਝ ਆਸਦੀ ਉਤਮ ਸ਼ਲੋਕ ਸਾਧ ਕੇ ਵਜੀ ਅਮਲਿਕ ਲਾਲ ਇਹ ਰਤਮ ਉਚਤਮ ਕੁਆਲਟੀ ਦੀ ਗੱਲ ਹੁੰਦੀ ਹੈ ਜਿਹੜੀ ਸਾਧ ਦੀ ਭਾਸ਼ਾ ਹੁੰਦੀ ਹੈ کو ਦੇ دے رہے ہیں ساتھ جو یہاں سے بول بولنا ہوتا ہے ساتھ جہاں سے جا کیونکہ اپ মুক্ত مکتی رہے ہو صاحب کہ اپ মুক্ত ہے وہ مکتی کیویں પ્રાપ્ત کر لیئے یا میں کیویں પ્રાપ્ત کیتی ہے مکتی مکتی کیویں પ્રાપ્ત کیتی جا سکتی ہے وہ گل دس ਉਹ ਕਿਤਾਬ ਕੋਈ ਦੀ ਗੱਲ ਹੁੰਦੀ ਹੈ ਜਿਹੜੀ ਸਿੱਖਿਆ ਨਾਲ ਮੁਕਤੀ ਪ੍ਰਾਪਤ ਹੋ ਜਾਏ ਉਦੋਂ ਉੱਚੀ ਸਿੱਖਿਆ ਹੋਰ ਕੋਈ ਹੁੰਦੀ ਹੋਈ ਨਹੀਂ ਕਹਿਣ ਦਾ ਮਤਲਬ ਇਹ ਹੈ ਜਿਹੜੀ ਸਿੱਖਿਆ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਾ ਸਕਦੀ ਹੈ ਐਸਿਆ ਗਿਆਨ ਦੇ ਸਕਦੀ ਹੈ ਕਰਾ ਸਕਦੀ ਹੈ ਜਿਸ ਨੂੰ ਮੁਕਤੀ ਪ੍ਰਾਪਤ ਹੋ ਜਵੇ ਉਹ ਉੱਚੀ ਕੋਈ ਸਿੱਖਿਆ ਦੀ ਗੱਲ ਹੁੰਦੀ ਹੋਈ ਨਹੀਂ ਸ਼ਲੋਕ ਸਾਜ ਕੇ ਗੱਲ ਦੇ ਵਿੱਚ ਉਹਦੀ ਕੀਮਤ ਹੁੰਦੀ ਏ ਗੱਲ ਦੀ ਉਹਦਾ ਕੋਈ ਮੁੱਲ ਨਹੀਂ ਹੁੰਦਾ ਅਬੁਲਿਕ ਲਾਲ ਉਹ ਬੁਲ ਗੁਣ ਔਰ ਅਬੁਲ ਵਪਾਰ ਕਰਦੇ ਨੇ ਉਹ ਗੁਣਾਂ ਦੀ ਗੱਲ ਕਰਦੇ ਨੇ ਐਸੇ ਗੁਣ ਦੱਸਦੇ ਨੇ ਛਾ ਪੈਦਾ ਹੁੰਦੇ ਨੇ ਸੁਲਕੇ ਗੱਲ ਨੂੰ ਜਿਹੜੀ ਕੋਈ ਵੀ ਗੱਲ ਨੂੰ ਬੁੱਲਲੇ ਚੰਦ ਦੇ ਬੁੱਲਲੇ ਉਹ ਸਿੱਖਿਆ ਸਮਝ ਲੋ ਇੱਕ ਹਾਲ ਰਤਨ ਹੁੰਦੇ ਨੇ ਸਿੱਖਿਆ ਹਾਲ ਰਤਨ ਦੇ ਤੂੰ ਜੇ ਮੰਨ ਲਈਏ ਮੱਤ ਵਿੱਚ ਰਤਨ ਜਵਾਹਰ ਮੜਕੋ ਉਹ ਜਿਹੜੀ ਗੱਲ ਕਹਿੰਦਾ ਉਹ ਜਿਹੜੀ ਮੱਤ ਦੇ ਰਿਹਾ ਉਹਦੇ ਵਿੱਚ ਰਤਨ ਜਵਾਹਰ ਮਾਨ ਜੜੇ ਹੋਏ ਹੁੰਦੇ ਨੇ ਦਲਾਂ ਦੇ ਵਿੱਚ ਜਿਹਨਾਂ ਦੀ ਕੋਈ ਕੀਮਤ ਨਹੀਂ ਆਪਾਂ ਕਹਾਂ ਲੱਖ ਰੁਪਏ ਦੀ ਗੱਲ ਕਰਦੇ ਇਹ ਗੱਲ ਦਾ ਤਾਂ ਕੋਈ ਬੋਲਿਆ ਹੀ ਨਹੀਂ ਆ ਹਗਲ ਨਹੀਂ ਸੀ ਉਸ ਕੇ ਵਜਨ ਉਮਲਿਕ ਲਾਲ ਇਹ ਰਤਨ ਹਾਂ ਇਹ ਉਮਲਿਕ ਲਾਲ ਰਤਨ ਗੁਰਬਾਣੀ ਦਾ ਕੋਈ ਬੋਲ ਨਹੀਂ ਕੋਈ ਦੇ ਵਿੱਚ ਜਿਹੜੇ ਦੱਸਿਆ ਗੱਲਾਂ ਨੇ ਇਹ ਕੋਈ ਕੀਮਤ ਨਹੀਂ ਸੁਣਤਕ ਮਾਵਤ ਹੋਦ ਆਪਰੇ ਲੋਕਾ ਨਿਸ਼ਤਾਰ ਸੁਣਤ ਕਮਾਵਤ ਕੱਲੇ ਸੁਣਾ ਕੇ ਆਦਾਰ ਨਹੀਂ ਗੁਰੂ ਸਮਾਈ ਕਰਦੇ ਜਿਹੜਾ ਅਸੀਂ ਗੁਰਬਾਣੀ ਸੁਣਦੇ ਆਂ ਪੜ੍ਹਦੇ ਆਂ ਇਹਦੇ ਨਾਲ ਉਧਾਰ ਨਹੀਂ ਗੁਰੂ ਇਹਦੇ ਨਾਲ ਮੁਕਤੀ ਨਹੀਂ ਹੋਣੀ ਇਹਦੇ ਨਾਲ ਪੜ੍ਹ ਹੀ ਆ ਸਕਦਾ ਡੁੱਬੇ ਹੋਏ ਸਾਰੇ ਮਾਇਆ ਦੇ ਵਿੱਚ ਪਾਪ ਸੰਕਰ ਜੀ ਡੁੱਬਿਆ ਹੋਇਆ ਆਸਮਾਨ ਬਾਣੀ ਸੁਣ ਕੇ ਉੱਪਰ ਨਹੀਂ ਆ ਸਕਦਾ ਉਹ ਨਹੀਂ ਗੁਰੂ ਕਮਾਵਤ ਉਹਨੂੰ ਬੰਦ ਕੇ ਉਹਨੂੰ ਸਮਝ ਕੇ ਧੀਰੇ ਤਰੀਕੇ ਨਾਲ ਉਹਨੂੰ ਬੰਦ ਕੇ ਫੇਰ ਹਰ ਹੁਲੋ ਕਮਾਉਂਦੇ ਮਰਣਾ ਬੋਦਕੇ ਚੱਲਣਾ ਵਰ ਵਾਲੀ ਜੀਵਨ ਜਿਉਣਾ ਇਹ ਕਮਾਈ ਹੈ ਹੋਰ ਕੁਝ ਨਹੀਂ ਹੈ ਨਾ ਨਾਮ ਦੇ ਕਮਾਈ ਬਸ ਉਹਨੂੰ ਲੋਕ ਕਰੀ ਜਾਓ ਬੜਾ ਬਣ ਕੇ ਇਹ ਸਮਝ ਕੇ ਜੀਵਨ ਜਿਹਾ ਸੋਖਾ ਕੰਮ ਜੋ ਵਰਗੀ ਤੁਸੀਂ ਆਪਣਾ ਧੋਖਾ ਦੇ ਜਾਓਗੇ ਫਿਰ ਝੂਠ ਬੋਲੀ ਜਾਓ ਠਗੀ ਠੋੜੀ ਕਰੀ ਜਾਓ ਵੈਰੂ ਵੈਰ ਕਮਾਈ ਨਹੀਂ ਹੈ ਜੋ ਗੁਰਬਾਣੀ ਜਿ ਕਿਹਾ ਹੋਇਆ ਉਹ ਸਿੱਖਿਆ ਤੇ ਅਮਲ ਕਰਨਾ ਉਹ ਕਮਾਈ ਹੈ ਉਹਦੇ ਚਲਾਨੇ ਕਮਾਈ ਹੈ ਜਿਹੜੇ ਨਹੀਂ ਚੱਲਦਾ ਇਹ ਜਿਹਨਾਂ ਨੇ ਚੱਲਣ ਦਾ ਹੱਦ ਤੱਕ ਜੋਰ ਨਹੀਂ ਦਿੱਤਾ ਉਹ ਆਪ ਜੋਰ ਹਰਾਮਖੋਰ ਸੀ ਦੁਨੀਆਂ ਨੂੰ ਬਰਬਾਦ ਕਰਦਾ ਸਿੱਖੀ ਬਰਬਾਦ ਕਿਉਂਕਿ ਆਪ ਚੱਲਣਾ ਨਹੀਂ ਸੀ ਜਿਹੜਾ ਆਦਮੀ ਚੱਲਣ ਦੀ ਗੱਲ ਕਰ ਉਹ ਆਪ ਚੱਲਣਾ ਬੈਠਾ ਆਪ ਨੂੰ ਜਨਣਾ ਕੋਈ ਸੀ ਤੇ ਦੂਜਿਆਂ ਨੂੰ ਚੱਲਣ ਨੂੰ ਕਹਦੇ ਤੇ ਬਈ ਕਹੇ ਕਿਹੜੇ ਮੂਨਾ ਕਹਿੰਦੇ ਕਿਹੜੇ ਮੂਨਾ ਕਹਿੰਦੇ ਉਹ ਦੂਜਿਆਂ ਨੂੰ ਚੱਲਣ ਨੂੰ ਪਹਿਲਾਂ ਤਾਂ ਸਮਝੇ ਕੋਈ ਨਹੀਂ ਆਈ ਕੁਰਬਾਨੀ ਚੱਲਣਾ ਤੱਕ ਪੱਸੇ ਰਿਹਾ ਉਹਨਾਂ ਨੂੰ ਗੱਲ ਕਰਨ ਦੇ ਵਿੱਚ ਕੁਰਬਾਨੀ ਅਥਾਣ ਵਿੱਚ ਸ਼ੰਕਾ ਬੜੀ ਰਹੀ ਵੀ ਉਹ ਅਸੀਂ ਕਹਿ ਰਹੇ ਆ ਠੀਕ ਵੀ ਹੈ ਕੁੜੀ ਵੀ ਜਿਹੜੇ ਸੰਤਾਂ ਨਾਲ ਡਰਦੇ ਦਿਲ ਤੇ ਬੋਲਦੇ ਨੇ ਪ੍ਰਚਾਰ ਕਰੇ ਜੰਦਾ ਬੋਲਦਾ ਸੇ ਤੋਂ ਭੱਜ ਜਾਂਦਾ ਲੁਕ ਜਾਂਦਾ ਵੀ ਕੋਈ ਆਂਦੇ ਸਾਨੂੰ ਪੁੱਛਣਾ ਲਵੇ ਕੋਈ ਕਨਫੀਡੈਂਸ ਨਾਲ ਗੱਲਾਂ ਇਹ ਨਹੀਂ ਕਰਦੇ ਕਨਫੀਡੈਂਸ ਨਾਲ ਜੋ ਕੁਝ ਅਦਾ ਕਰ ਰਹੇ ਆ ਠੀਕ ਕਰ ਕਬੂਨਾ ਕੀ ਨੇ ਸੀ ਕਿਹੜੀ ਗੱਲ ਹੋਈ ਸੀ ਇਹ ਤਾਂ ਇੱਕ ਦਿਹਾੜੀ ਆ ਆਪਣੀ ਦਿਹਾੜੀ ਕੋਈ ਲੱਗ ਦਿਹਾੜੀ ਨੂੰ ਕੀ ਲੱਗੇ ਜੇ ਕਹੀ ਖਰਾਬ ਜੋ ਖੜ ਜਾਂਦੇ ਆ ਬਾਰ ਬਾਰ ਕਹੀ ਦੇਖ ਵਾਲਖ ਦਾ ਘਮ ਘਟ ਹੋਊਗਾ ਉਹ ਮੁਸਾਬੰਦਾ ਰਹੂਗਾ ਇਤਹਾਸ ਦੇ ਆਗੇ ਤਾਂ ਕਮ ਹੋ ਰਿਹਾ ਸਾਨੀ ਸੋਨਤ ਕਮਾਵਤ ਹੋ ਤੋ ਉਧਾਰ ਆਪ ਤਰੇ ਲੋਕੈ ਨਿਸਾਰ ਸੋਨਤ ਕਮਾਵਤ ਹੋ ਕਹਿ ਜਿਹੜਾ ਕਮਾਈ ਕਰ ਉਹਦਾ ਉਧਾਰ ਦਿੱਤਾ ਜਿਹੜਾ ਕਮਾਈ ਕਰਕੇ ਉਧਾਰ ਕਰ ਲੂ ਆਪ ਤਰਾ ਉਹੀ ਆਪ ਤਰੂ ਲੋਕਾਂ ਨਿਸਾਰ ਜੋ ਕਹਿ ਨਿਸਾਰ ਉਹ ਸਾਦੇ ਹੈ ਉਹੀ ਸਾਧਾ ਜਿਹਦੇ ਸੁਣ ਕੇ ਕਮਾ ਲਿਆ ਉਧਾਰ ਆਪਣਾ ਕਰ ਲਿਆ ਲੋਕਾਂ ਨੂੰ ਦੱਸ ਕੇ ਝਾਲਣ ਦੀ ਗੱਲ ਕਰੂ ਵੀ ਐਂ ਤਰੀਦਾ ਦਿਸਾਰ ਦਸਤਾਰਾ ਕਰਕੇ ਦੂਸਾ ਆਚਰ ਝੂਠ ਦਾ ਉਹ ਜਿਹੜੇ ਫਸੇ ਨੇ ਲੋਕ ਨਾ ਕਿ ਸੱਚ ਕੀ ਹੈ ਝੂਠ ਕੀ ਹੈ ਬਹੁਤੀਆਂ ਮੱਤਾਂ ਦੇ ਜਾਦ ਵਿੱਚ ਫਸੇ ਨੇ ਉਹ ਵੇਖਾਰ ਵਤਾਰ ਕੇ ਦੱਸ ਦੂਗਾ ਕਿ ਸੱਚਾ ਹੈ ਝੂਠਾ ਹੈ ਜਦ ਐ ਹੁੰਦਾ ਜਿਹੜੇ ਅਸੰਖ ਜਪ ਨੇ ਪਤ ਜਦ ਐਨੇ ਨੇ ਦੁਨੀਆ ਦੇ ਵਿੱਚ ਪਤਾ ਹੀ ਕੋਈ ਦੀ ਉਹ ਜਪ ਕਿਹੜਾ ਹੈ ਜਿਹੜਾ ਦਰਗਾਹ ਚ ਪ੍ਰਵਾਨ ਹੈ ਅਸੰਖ ਤਾਪਾ ਉਹ ਤਪ ਕਿਹੜਾ ਹੈ ਜਿਹੜਾ ਦਰਗਾਹ ਚ ਪ੍ਰਵਾਨ ਹੈ ਉਹ ਤਾਂ ਪ੍ਰਮੋਕਲ ਗੁਰਬਾਣੀ ਚ ਉਹ ਜਪ ਨੂੰ ਓਕਲ ਹੈ ਜਿਹੜਾ ਪ੍ਰਵਾਨ ਉਹ ਭਗਤੀ ਕਿਹੜੀ ਹੈ ਜਿਹੜੀ ਦਰਗਾਹ ਚ ਪ੍ਰਵਾਨ ਗੱਲ ਇਹ ਹੈ ਮਤਲਬ ਇਸ ਅੰਦਾ ਹੈ ਦੁਨੀਆ ਕੀ ਕਰਦੀ ਹੈ ਭਗਤੀ ਕੀ ਐਕਸਲਰੇਟ ਕਰਦੀ ਹੈ ਕੋਈ ਔਲਾ ਨਹੀਂ ਉਹ ਆਪਣੇ ਆਪਣੀ ਬੁੱਧ ਅੰਧਾਰ ਆਪਾਪਨੀ ਬੁੱਧ ਹੈ ਜੇਤੀ ਵਨ ਤੋਂ ਬੰਨ ਭੈਣ ਤੋਂ ਤੇਤੀ ਆਪਣੇ ਬੁੱਧੀ ਅੰਸਾਰ ਦੁਨੀਆ ਕਰਦੀ ਹੈ ਕਰਦੀ ਰਹੇ ਪਰ ਦਰਗਾਹ ਕਿਹੜੀ ਪਰਵਾਨ ਹੈ ਸਵਾਲ ਇਸ ਰੰਦ ਉਹਦਾ ਵਿਸਤਾਰ ਕਰਨਾ ਉਸ ਦਾ ਆਹ ਦਰਗਾਹ ਪਰਵਾਨ ਨਾਮ ਦਰਗਾਹ ਪਰਵਾਨ ਕਿਹੜਾ ਹੈ ਸੁਬਿਹਰਾ ਕੋਟੀ ਦਰਗਾਹ ਪਰਵਾਨ ਕਿਹੜੀ ਹੈ ਸਿਮਰਨ ਦਰਗਾਹ ਪਰਵਾਨ ਕਿਹੜਾ ਹੈ ਆਰਾਧਨਾ ਕਾਦੀ ਕਰੀ ਦੀ ਹੈ ਜਿਹਨਾਂ ਕੋ ਪ੍ਰਾਪਤੀ ਹੈ ਇਹ ਸਭ ਫੈਸਲੇ ਕੀ ਦਰ ਪਰਵਾਨ ਕਰਦੇ ਜਿਹੇ ਸਾਰ ਸੰਤ ਕਮਾਵਤ ਹੋ ਉਧਾਰ ਆਪ ਤਰ੍ਹਾਂ ਲੋਕਾਂ ਵਿੱਚ ਸਾਰ ਆਪ ਤਰ੍ਹਾਂ ਲੋਕਾਂ ਨੇ ਸਾਰ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਮੁਕਤ ਹੁੰਦਾ ਹੈ ਸਦਾਰ ਦੀ ਮੁਕਤੀ ਵਾਸਤੇ ਉਹ ਕੁਝ ਉਪਦੇਸ਼ ਕਰਦਾ ਹੈ ਬੋਲਦਾ ਮੁਕਤ ਕਰੇ ਸੰਸਾਰ ਦਾ ਮਤਲਬ ਦੱਸਦਾ ਹੀ ਹੈ ਉਹ ਮੁਕਤ ਨਹੀਂ ਕਰ ਸਕਦਾ ਵੈਸੇ ਉਹਦਾ ਦੱਸਣਾ ਉਪਦੇਸ਼ ਕਰਨਾ ਹੀ ਮੁਕਤ ਕਰੇ ਆ ਹੋਰ ਇਹ ਨਹੀਂ ਵੀ ਕੋਸ਼ਿਸ਼ ਕਰ ਕਰਦੇ ਜੇ ਫਿਰ ਤਾਂ ਸਾਰਿਆਂ ਨੂੰ ਮੁਕਤ ਕਰ ਦੇਵੇਗਾ ਆ ਕਿਦਾ ਰਵਾਇਤੀ ਪਿੱਛੇ ਸ਼ਰਤਾਂ ਹੀ ਆਂਦੀਆਂ ਨੇ ਬਸ ਤੋਹੀ ਹੋ ਸਕਦਾ ਜਿਹੜਾ ਆਪ ਕਮਾਵੇ ਸੁਣ ਤਾਂ ਕਮਾਉਂਦਾ ਹੋਤਾ ਦਾ ਅਸਤੇ ਆਦਾ ਗਿਆ ਜਿਹੜਾ ਸੁਣ ਕੇ ਕਮਾਉਂਦਾ ਰੋ ਸਹੇਲ ਨੂੰ ਆਪ ਤਰੇ ਲੋਕਾਂ ਦੇ ਨਿਸਤਾਰ ਆਪ ਗੱਲ ਕਹਿੰਦਾ ਸੁਣ ਕੇ ਕਮਾਉਂਦਾ ਉਦਾਰ ਹੋ ਤਾਂ ਲੋਕ ਤਾਂ ਤਾਂ ਨਹੀਂ ਸਫਲ ਜੀਵਨ ਸਫਲਤਾ ਮਨ ਲਾਗਾ ਹਰ ਰੰਗ ਸਫਲ ਜੀਵਨ ਜਿਹਦਾ ਆਪਣਾ ਜੀਵਨ ਸਫਲ ਹੋ ਗਿਆ ਜਿਹਨੇ ਆਪਣਾ ਜੀਵਨ ਸਫਲਾ ਕਰ ਲਿਆ ਉਹਦੀ ਸੰਗਤ ਕਰਨੀ ਵਿੱਚ ਹੀ ਸਫਲਤਾ ਹੈ ਜੂਹਦੀ ਸੰਗਤ ਨਹੀਂ ਕਰੀਦੀ ਕਹਿਣਾ ਮਤਲਬ ਜਿਹੜਾ ਆਪ ਡੁੱਬ ਗਿਆ ਸਫਲ ਨਹੀਂ ਹੋ ਸਕਿਆ ਉਹਦੀ ਸੰਗਤ ਥੋੜੂ ਵੀ ਲੱਗੂਗਾ ਬਈ ਇਸ ਵਕਤ ਤੇ ਮੁਝੇ ਬਣ ਲਿਏ ਕਿਵੇਂ ਵੀ ਬੰਦੇ ਦੀ ਜਿਹੜੇ ਸੰਤ ਫਿਰਦੇ ਨੇ ਸਾਰਿਆਂ ਦੀ ਸੰਗ ਦੇ ਇੱਕ ਦਮ ਇਸੇ ਬੰਦੀਆਂ ਨੂੰ ਛੁੱਟ ਜੂਗੀ ਸੰਤ ਨੂੰ ਕਹਨ ਨੂੰ ਦੇਖੋ ਵੀ ਇਹ ਤਾਂ ਡੁੱਬਿਆ ਹੋਇਆ ਜੇ ਡੁੱਬਿਆ ਹੋਇਆ ਤੈਨੂੰ ਡੋਬ ਦੂਗਾ ਦੂਰ ਹੋ ਛੱਡ ਕੇ ਉਹ ਸਾਖਤ ਹੈ ਸੰਤ ਨਹੀਂ ਹੈ ਸਾਖਤ ਹੈ ਫਿਰ ਸੰਤ ਕਹਣ ਵਾਲਾ ਹੀ ਸਾਖਤ ਹੈ ਪਰਲੀ ਗੱਲ ਮਹਾਪੁਰਖ ਕਹਣ ਵਾਲਾ ਹੀ ਸਾਖਤ ਹੈ ਜਿਹੜਾ ਮਹਾਂਪੁਰਖ ਕਹੁੰਦਾ ਹੈ ਸੰਤ ਕਹੁੰਦਾ ਹੈ ਉਹ ਸਾਖਤਾ ਦੂਰ ਹੋ ਜਾਗੇ ਬਚਣਾ ਨਹੀਂ ਐਸੇ ਜਹਾਜ਼ بڑے بڑے ਹੁੰਦੇ ਨੇ ਲੈ ਕੇ ਡੁੱਬ ਜਾਂਦੇ ਨੇ ਜੇ ਜਹਾਜ਼ ਡੁੱਬਣਾ ਜੇ ਜਹਾਜ਼ ਡੁੱਬੂ ਉਸੇ ਬੈਠਣ ਦਾ ਵਜੂਗਾ ਜੇ ਜਹਾਜ਼ ਡੁੱਬ ਰਿਹਾ ਸਮੁੰਦਰ ਦੇ ਵਿੱਚ ਤਾਂ ਫਿਰ ਜਿਹੜੇ ਸਵਾਰ ਨੇ ਉਹਨਾਂ ਨੇ ਡੁੱਬਣਾ ਹਾਂਜੀ ਸਫਲ ਜੀਵਨ ਆਪ ਸਫਲ ਤੇ ਲਕੀਬਤ ਦਾ ਚੁਕਾ ਹਾਂ ਜਿਹਨੂੰ ਜੀਵਨ ਚ ਸਫਲਤਾ ਪ੍ਰਾਪਤ ਹੋਊਗੀ ਆਪਣੇ ਮੁਕਤੀ ਪ੍ਰਾਪਤ ਕਰ ਲਈ ਜੀ ਨੇ ਸਮਝ ਲਈ ਜੀ ਨੇ ਗੁਰਬਾਣੀ ਕਮਾਲੀ ਜੀ ਨੇ ਗੁਰਬਾਣੀ ਉਹਦੀ ਸੰਗਤ ਕਰਨ ਦੇ ਵਿੱਚ ਹੀ ਸਫਲਤਾ ਦਾ ਫਾਇਦਾ ਪਰਨਾ লাভ ਕੋਈ ਨਹੀਂ ਇਹ ਗੁਰਬਾਣੀ ਕਹਿ ਰਹੀ ਹੈ ਜਿਹਨੇ ਗੱਲ ਮੰਨਣੀ ਆ ਜਾਂ ਨਹੀਂ ਮੰਨਣੀ ਜਿਹਦੇ ਕਰਨਾ ਹੈ ਕਰੇ ਬਜਾਏ ਕਿਸੇ ਆਦਮੀ ਦੀ ਸੰਗਤ ਕਰਨਾ ਹੋ ਜੇ ਨਹੀਂ ਇਹ ਜਿਆ ਲਬਿਆ ਸਫਲ ਜੀਵ ਬਣ ਪੜਾ ਗੁਰਬਾਣੀ ਨੂੰ ਮੈਂ ਪੜ ਕੇ ਵਿਚਾਰੀ ਜਾਓ ਕੁਝ ਜ਼ਰੂਰ ਲੱਗਣਾ ਦੁਹਰੇ ਇਹਨਾ ਦੀ ਸੰਗਤ ਦੇ ਡੁੱਬਿਆਂ ਨਹੀਂ ਜ਼ਰੂਰ ਕਰਦੀ ਡੁੱਬਿਆਂ ਦੀ ਸੰਗਤ ਕਬੀਰ ਕਬੀਰ ਨੇ ਡਾਇਰੈਕਟ ਆਹੋ ਚੀਤੀਆ ਜਾ ਕੇ ਮਗਰ ਮਗਰ ਤੇ ਐਸੀ ਬੰਦੇ ਉਹ ਆਪ ਪੜਦੇ ਸੀ ਉਹਨੂੰ ਕੋਈ ਸਮਝਦੀ ਸੀ ਉਹ ਕਹਿੰਦਾ ਉਹ ਤੁਹਾਡੀਆਂ ਗੱਲਾਂ ਮੈਂ ਨਹੀਂ ਤਸੱਲੀ ਨਹੀਂ ਕਰਉਂਗਾ ਕਹਿੰਦਾ ਯਾਰ ਗੱਲਾਂ ਤਾਂ ਠੀਕ ਨੇ ਸਾਡੂ ਦੇ ਨੀ ਸਮਝੇ ਤੂੰ ਆ ਪੜ ਲਾ ਜਾ ਗੁਰਬਾਣੀ ਜੋ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਠੀਕ ਤਾਂ ਗੁਰਬਾਣੀ ਦਾ قصੂਰ ਥੋੜੀਆ قصੂਰ ਸਾਡਾ ਹੈ ਉਹ ਲੋ ਬਤਾਇਆ ਕਰੀ ਇਹਨਾਂ ਗੁਰਬਾਣੀ ਇਹੀ ਲਿਖਿਆ ਹੋਣਾ ਜੇਲਾ ਇਹ ਸੰਬੰਧਾ ਗੁਰਬਾਣੀ ਚ ਜੋ ਸਿੱਖ ਪ੍ਰਚਾਰ ਕਰਦੇ ਇਹੀ ਲਿਖਿਆ ਹੈ ਉਹ ਆਪ ਵੀ ਮੂਰਖ ਆਵਾਪਾ ਕੇ ਹੋਜੇ ਉਹਨੇ ਮੂਰਖਾਂ ਦੇ ਕਹੇ ਨੂੰ ਕਹਿੰਦਾ ਸੱਚ ਮੰਨ ਲੈ ਉਹ ਆਪ ਮੂਰਖਾ ਜਿਹੜਾ ਮੰਨਦਾ ਵੀ ਜੋ ਸਿੱਖ ਕਹਿ ਰਹੇ ਨੇ ਉਹ ਠੀਕ ਹੋਊਗਾ ਤੁਸੀਂ ਕਿ ਮੈਂ ਕਹਾਂ ਸਭ ਠੀਕ ਹੋਊਗਾ ਸਿੱਖ ਤਾਂ ਸਾਰੇ ਹੋਣਗੇ ਭਾਈ ਹਾਂਜੀ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮੰਨ ਲਾਗਾ ਹਰ ਰੰਗ ਸਫਲ ਜੀਵਨ ਸੁਭਕਤਾ ਦਾ ਸੰਗ ਜੀਵਨ ਵੀ ਉਹਦਾ ਸਫਲ ਆ ਸੰਗਤ ਕਰਨੀ ਵੀ ਉਹਦੀ ਉਹਦੀ ਸੰਗਤ ਕਰਨੀ ਹੀ ਸਫਲਤਾ ਦਾ ਜਾ ਕੇ ਮੰਨ ਲਾਗਾ ਹਰ ਰੰਗ ਜੀ ਤੇ ਆਪਮ ਦੇ ਵਿੱਚ ਨਾਮ ਦਾ ਰੰਗ ਜਿਹਨੂੰ ਆਪ ਜੜਿਆ ਹੋਇਆ ਉਹਦੀ ਸੰਗਤ ਨਾਲ ਕੋਈ ਰੰਗ ਜੜ ਜੂ ਮੋਟਾ ਉਸ ਤੋਂ ਤਰ੍ਹਾਂ ਕੋ ਬਣੋਟਾ ਲੈ ਲੂਚ ਲੋਜਨਾ ਕਰ ਲੋੜ ਹੈ ਉਹਨਾਂ ਲੈ ਲੂ ਬਾਕੀ ਤੱਕੇ ਕੋਈ ਨਹੀਂ ਮਹਿਲਣਾ ਜਿਹੜਾ ਆਪੇ ਨੀ ਗੁਰਵਾਨੀ ਦਾ ਸਰ ਹੋਇਆ ਜਿਹਦੇ ਤੇ ਕਹਾਂ ਨਾ ਬਲਾ ਜਿਹੜੇ ਬੰਦੇ ਉੱਪਰ ਗੁਰਵਾਨੀ ਦਾ ਖੋਤੇ ਹੀ ਸਰਦਿਸ਼ ਹੋਇਆ ਚਾਹੇ ਉਹ ਠੀਕ ਵੀ ਅਰਥ ਕਰਦਾ ਚਲੋ ਮੰਨ ਲਿਆ ਸੁਣ ਕੇ ਕਿ ਪਰ ਇਹਦੇ ਤੇ ਆਵਰਾਗੇ ਨਹੀਂ ਜੜਿਆ ਉਹਦੀ ਸੰਗਤ ਦੇ ਵਿੱਚ ਤੁਹਾਨੂੰ ਕੀ ਫਾਇਦਾ ਹੋ ਉਹਦੀ ਸੰਗਤ ਵਿੱਚ ਰੰਗ ਚੜ੍ਹਣਾ ਨਹੀਂ ਤੋ ਤੂੰ ਕੋ ਸੰਗਤ ਤੇ ਸੰਗਤ ਕਿਉਂ ਤਾਂ ਜਦ ਦਾ ਕੀ ਫਾਇਦਾ ਸੰਗਦ ਉਹ ਕਰਦਾ ਆਦਮੀ ਜੀ ਤੋਂ ਪ੍ਰਭਾਵਿਤ ਹੋਵੇ ਜੇ ਪ੍ਰਭਾਵਿਤ ਨਹੀਂ ਸੰਗਦ ਨਹੀਂ ਕਰਦਾ ਜੇ ਉਹ ਸਾਡੀ ਤੋਂ ਪ੍ਰਭਾਵਿਤ ਹੈ ਜਿਹਨੂੰ ਰਗ ਰੰਗ ਚੜਿਆ ਹੀ ਨਹੀਂ ਤਾਂ ਚੜਨਾ ਸੰਗਦ ਕਰਨ ਵਾਲੇ ਨੂੰ ਨਹੀਂ ਉਹ ਉਸੇ ਚ ਕੋਸ਼ ਹੈ ਨਾ ਰੰਗ ਚੜ੍ਹਦੇ ਖੁਸ਼ਾ ਹੋਪਦਾ ਸੰਗਦ ਤਾਂ ਕਰਦਾ ਉਹ ਜਿੱਥੇ ਸੁਖੀ ਉਹਦੀ ਜਿਹਨਾਂ ਦੀ ਸੰਗਤ ਕਰਨਦਾ ਹੈ ਜਿਹੇ ਦੀ ਉਹਦੀ ਸੁਰਤੀ ਬਤੀਆ ਉਹਹੀ ਜਿਹੋਈ ਉਹ ਚੇਲੇ ਦੀ ਸੁਰਤੀ ਬਤੀਆ ਸੰਗਤ ਕਰਨ ਵਾਲੇ ਦੀ ਉਹ ਉਹ ਚਾਹੁੰਦਾ ਉਹ ਡੇਰੇ ਦੀ ਚਾਹੁੰਦਾ ਬਾਅਦ ਚ ਉਹ ਵੀ ਅੱਖ ਦੇ ਸਾਰੇ ਗੱਲ ਤੇ ਹੈ ਉਹ ਸੰਗਤ ਚਾਹੁੰਦਾ ਵੀ ਆਜ ਦੀ ਸੰਗਤ ਹੈਗੀ ਆ ਬਾਅਦ ਆਪਣਾ ਤੋਰੀ ਫੁੜਕਾ ਚੱਲੀ ਜਾਊਗਾ ਉਹ ਇੰਦੀ ਗੱਲ ਤੇ ਅੱਖਾਂ ਵੀ ਸਿਰਫ ਹੋਰ ਕੋਈ ਨਹੀਂ ਚੀਜ਼ ਹੈ ਇਹੀ ਕੋ ਜਾ ਤਾਂ ਹੀ ਪਿੱਛੇ ਭੇਜਦੇ ਪਿੱਛੇ ਲੜਾਈ ਆਉਂਦੀ ਆ ਅ ਝਗੜੇ ਕਾਦੇ ਹੋਣ ਨੇ ਰੋਟੀ ਲਈ ਝਗੜੇ ਹਾਂਜੀ ਜੈ ਸ਼ਬਦ ਅਨਹਦ ਬਾਜਾ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਜੈ ਸ਼ਬਦ ਅਨਹਦ ਬਾਜਾ ਜਿਹੜਾ ਸੰਤ ਘੰਗਮਾਵਤ ਜਿਹਨੂੰ ਰੰਗ ਚੜ ਗਿਆ ਬਰਕਰੰਗ ਤੇ ਆ ਜਾਓ ਜੇ ਨੂੰ ਰੰਗ ਚੜ ਜਾਂਦਾ ਕੋ ਪਾਣੀ ਦੇ ਅੰਦਰ ਧੁੱਕੀ ਪਾਣੀ ਪ੍ਰਗਟ ਹੁੰਦੀ ਹੈ ਜੈ ਜੈ ਸ਼ਬਦ ਅਨਾਹਦ ਵਜਾ ਅਨਾਹਦ ਅਨਾਹਦ ਦੇ ਅੰਦਰ ਪ੍ਰਗਟ ਹੁੰਦਾ ਰੰਗ ਚੜੇ ਤੇ ਬਿਨਾ ਇੱਕ ਹੋ ਕੇ ਉੱਗਦਾ ਨਹੀਂ ਜਿਹੜਾ ਇੱਕ ਹੋ ਕੇ ਉੱਗਦਾ ਰਹਾਂ ਇੱਕ ਹੋਏ ਤੇ ਬਿਨ ਉੱਗਦਾ ਜੇ ਰੰਗ ਨਾ ਚੜੇ ਪੂਰਾ ਕਿਉਂਕਿ ਇਹ ਹੋਏ ਤੇ ਕਾਲਾ ਇੰਤਜ਼ਾਰ ਹੈ ਇਸ ਜਿਆਦਾ ਜੋ ਤੇ ਦਿੱਤੀ ਹੈ ਉਹ ਥੋੜੀ ਹੋਤੀ ਰਹੇ ਕਿ ਤਨਾ ਕਿਤੇ ਉਹਦੇ ਚ ਕਭੀ ਹੈ ਉਹ ਬੇਤਾ ਨਹੀਂ ਉਹ ਤਾਂ ਕਹਿੰਦਾ ਹੈ ਕਿ ਉਸ ਦੀ ਜਲ ਜ਼ਾਚਾ ਕਾਰਨ ਚਾ ਤਰਬ ਦੁਖ ਪਾਵੈ ਪਰ ਰੁਕਿਆ ਹੋਇਆ ਕਿਉਂ ਆਪਣੀ ਜਿਹੜਾ ਜਿਹੜਾ ਕਹਿ ਰਿਹਾ ਵੀ ਮੈਨੂੰ ਦੇਨਾ ਉਹ ਤਾਂ ਮੰਗ ਮੰਗਦਾ ਤਾਂ ਮੰਗੂ ਮੰਗਦੇ ਦਾ ਕੀ ਹੋਦਾ ਕਭੇ ਮੰਗਣਾ ਪਰ ਦੇਣ ਵਾਲੇ ਦਾ ਇਹਨੂੰ ਮੈਂ ਧਮਕ ਨਾ ਦਵਾ ਦੇਰ ਦੇ ਕਾਬਿਲ ਵੀ ਹੈ ਕਿ ਨਹੀਂ ਇਦੋਂ ਅਸੀਂ ਮਾਦੇ ਦਾ ਗੁਰਬਾਣੀ ਦਾ ਪ੍ਰਚਾਰ ਦੀ ਅਥਾਰਟੀ ਜੇੜਾ ਲਾ ਕੇ ਦੇੜਾ ਲਗਿਆ ਜੇ ਗੱਲ ਵਿਗਾੜ ਕੇ ਕਹਿਣ ਲੱਗਿਆ ਭੋਲ ਵਿਗਾੜਨਾ ਕਿ ਫਿਰ ਦੇਖੋ ਆਖੇ ਭੋਲ ਵਿਗਾੜ ਜੋ ਮੂਲ ਸੁਣਨੇ ਹੈ बोल ਉਹਨੂੰ ਵਿਗਾੜਨ ਲੱਗਿਆ ਭਲਾ ਕਿਸੇ ਦੇ ਪ੍ਰੈਸ਼ਰ ਚ ਆ ਕੇ ਲੋਭ ਚ ਜਿਵੇਂ ਸਿਣੀ ਕੰਨ ਲਾ ਕੇ ਕਿਹੜੀ ਜਦ ਕਿ ਉਹ ਲੱਗਿਆ ਸਾਰੇ ਹਿੰਦ ਦਾ ਦੰਦ ਗੁੱਡ ਨੂੰ ਮੰਨਦੇ ਹੀ ਕੋਣ ਸੀ ਈਡੋਟ ਨੂੰ ਨਹੀਂ ਮੰਨਦੇ ਸੀ ਐਵੇਂ ਜੋ ਵਰਜੀ ਅਸੀਂ ਕਹੀਏ ਹੁਣ ਝੂਠ ਬੋਲਣ ਜੋ ਵਰਜੀ ਬੋਦੀ ਗਈ ਅੱਜ ਸੱਦੂ ਕੋਣ ਮੰਨਦਾ ਜਿਹੜੇ ਨਾਲ ਸਾਨੂੰ ਬਰੋਧਦੇ ਅੱਜ ਉਹਨਾਂ ਨੂੰ ਕੋਣ ਮੰਨਦਾ ਜੋ ਉਹ ਪ੍ਰਚਾਰ ਕਰ ਰਹੇ ਨੇ ਉਹ ਉਹਨਾਂ ਦੇ ਹਿਸਾਬ ਨਾਲ ਜੋ ਪ੍ਰਚਾਰ ਅੱਜ ਉਹ ਕਰ ਰਹੇ ਨੇ ਵਿਸ਼ਨੜੀ ਸੀ ਨਾ ਰਾਵਾਂ ਬਾਗ 2.5 ਕਰੋੜ 3 ਕਰੋੜ ਐਨੇ ਕਰੋੜ ਸਿਰਸੀ ਨਾਂਕ ਦਾ 10.5 ਕਰੋੜ ਸੀ ਆਸਰ ਕੋ ਲੈ ਨਾ ਹੋ ਜੇ ਸਿੱਕੇ ਵੀ ਪਹਿਲੇ ਭਗਤਾਂ ਦੇ ਸੀ ਇਹਦੇ ਭਗਤਾਂ ਦੇ ਸਰ ਪਤੀ ਲਹਿਰ ਦਾ ਸਰ ਸੀ ਲੋਕਾਂ ਤੇ ਉਹਨਾਂ ਦੇ ਕੋਈ ਵੀ ਵਿਆਹ ਹੋ ਗਿਆ ਉਹਦਾ ਹੁਟਾ ਕੋਈ ਵੀ ਵਿਆਹ ਹੋ ਗਿਆ ਚਲੋ ਥੋੜੇ ਬਹੁਤ ਚੱਲੇ ਹੋਣੇ ਨਾਲ ਲੋਕ ਜਰੂਰ ਜਿਹੜੇ ਪਹਿਲੇ ਹੀ ਭਗਤੀ ਲਹਿਰ ਵਿੱਚ ਸੀ ਪਹਿਲਾਂ ਵੀ ਚਲਦਾ ਸੀ ਨਹੀਂ ਸੀ ਸਮਝ ਸਾਰਿਆਂ ਨੂੰ ਇਸ ਕਰਕੇ ਜਿਹੜਾ ਐਡਾ ਛੇ ਉਹ ਨਾ ਉਗਾ ਪੈਂਦਾ ਭਾਂਜੇ ਜੈਸੀ ਮ ਆਵੇ ਫਸਮੂ ਦੀ ਬਾਣੀ ਜੈਸਾ ਦਾ ਤਰੀਕ ਗਿਆਨ ਲੈ ਲਓ ਬੋਲਣਾ ਬਾੜਨੀ ਵਿੱਚ ਬੋਲ ਤਾਂ ਨਹੀਂ ਮਗਰ ਦੋ ਜੇ ਲਾਲਚੇ ਉਹਨੂੰ ਦੇਤਾ ਲਾਲਚ ਸ੍ਰੀ ਜਾਨੂ ਸਿੱਧਾ ਨੇ ਸਾਰੇ ਰਾਜੇ ਉਹਨਾਂ ਨੂੰ ਮੰਨਦੇ ਨਹੀਂ ਸਤਾਣ ਰੋਗਾਂ ਰਾਜੇ ਕਾ ਤੇ ਪੜਾਏ ਰਾਜਾ ਨੇ ਕਾ ਪੜਾ ਲੇ ਤੇ ਯੋਗੀ ਬਣ ਗਏ ਤੇ ਤੋਸਾਂ ਦੇ ਬੜਬੜੀਆਂ ਜਾਇਦਾਦਾਂ ਦੀਆਂ ਉਹਨੂੰ ਕਿਹਾ ਤੂੰ ਆਨਾਤ ਦੇ ਹੀਲਣੇ ਤੈਨੂੰ ਗੁਰੂ ਬਣਾਈਏ ਤੇ ਸਮਝ ਗਿਆ ਕਿਥੋਂ ਆਇਆ ਤੇ ਉਹਨੂੰ ਬਾਣੀ ਬੁਰਾਈ ਕਰ ਮੜ ਜਾਂਦੀ ਸੱਚੇ ਹੈ ਜਿਹੜੀ ਗੱਲ ਕੋਈ ਬੈਠੇ ਨੇ ਸੱਚ ਬੋਲ ਦੀ ਜੁਰਤ ਹੈ ਕਿਸੇ ਦੀ ਹੋਈ ਐਸਾ ਸੱਚ ਇਹ ਸੱਚ ਬੋਲ ਸੁਰੀਕਾ ਦਾ ਨਾਨਕ ਦਾ ਜੋ ਮੁੰਡਾ ਤਾਂ ਕਹਿੰਦੇ ਨੇ ਨਾਨਕ ਦਾ ਮੁੰਡਾ ਹੋਵੇ ਉਹਰੀ ਨਾਨਕ ਦਾ ਜਵਾਨ ਦਾ ਮੁੰਡਾ ਹੁੰਦਾ ਗੁਰਬਾਣੀ ਦਾ ਜਵਾਨ ਦੀ ਕੋਈ ਥੀ ਕੋ ਤੁੰਦਾ ਰੋਬ ਦੀ ਨਹੀਂ ਨਹੀਂ ਸੱਚ ਬੋਲਣ ਦੀ ਜੁਰਤ ਸਿੱਖਾਂ ਜੇਗੀ ਜੀ ਜੇ ਸੱਚ ਬੋਲਣ ਦੀ ਜੁਰਤ ਹੈ ਨਹੀਂ ਉਹ ਸਿੱਖੇ ਨਹੀਂ ਉਹ ਤਾਂ ਸਿੱਖੇ ਨਹੀਂ ਸੱਚ ਬੋਲਣ ਦੀ ਜੁਰਤ ਨਹੀਂ ਉਹਨੇ ਮੰਨ ਕਬੂਲ ਨਹੀਂ ਨਾ ਕੀਤਾ ਸੱਚ ਤਾਂ ਨਹੀਂ ਬੋਲਦਾ ਕਿਉਂਕਿ ਉਹ ਕਹਿੰਦਾ ਡਰ ਹੈ ਕਿ ਤਰਨ ਉਹ ਡਰਦੀ ਵਜ੍ਹਾ ਨਾਲ ਸੱਚ ਨਹੀਂ ਬੋਲਦਾ ਚਾਹੇ ਸਮਾਜਿਕ ਡਰ ਹੋਵੇ ਆਪਣੇ ਅੰਦਰ ਵੀ ਜਾਂ ਸਿੱਖੀ ਕਹਿਣਗੇ ਮੈਨੂੰ ਇਹ ਤਾਂ ਸਦਾ ਹੀ ਬੋਲੀ ਜਾਂਦਾ ਗੁਫਾਟਾ ਹੋ ਗਿਆ ਇਹ ਤਾਂ ਆਪਣੇ ਵੀ ਗੁਦਾਨ ਕਦੇ ਬੁੱਢਾ ਜਿਆ ਦੀ ਵੀ ਲਾਇਕੀ ਕਰਦਾ ਆਪਣੀ ਰੋਟੀ ਦਾ ਡਰ ਆ ਵੀ ਮੈਨੂੰ ਮੇਰੇ ਰੋਹ ਸਿੱਧ ਟੁੱਟ ਜਾਂਦੇ ਕਿ ਤਣਾ ਕਹਦੇ ਆਪਣੀ ਰੋਟੀ ਦਾ ਡਰ ਦੇ ਵੀ ਬੋਲੇ ਲੋਕ ਹੋ ਜੈ ਜੈ ਸ਼ਬਦ ਅਨਾਹਦ ਵੱਜਾ ਸੁਣ ਸੁਣ ਆਨੰਦ ਕਰੇ ਪ੍ਰਭ ਗੱਜ ਜੈ ਜੈ ਸ਼ਬਦ ਅਨਾਹਦ ਵੱਜਾ ਜਦੋਂ ਅੰਦਰੋਂ ਤੁਰਕੀ ਬਾਣੀ ਕਰਗਟ ਹੁੰਦੀ ਹੈ ਸ਼ਬਦ ਗੁਰੂ ਪ੍ਰਗਟ ਹੁੰਦਾ ਸੁਣ ਸੁਣ ਆਨੰਦ ਕਰੇ ਪ੍ਰਭ ਗੱਜਾ ਤਾਂ ਉਹਨੂੰ ਸੁਣ ਕੇ ਆਨੰਦ ਪੈਦਾ ਹੁੰਦਾ ਉਹ ਤੁਰਕੀ ਬਾਣੀ ਨੂੰ ਸੁਣ ਕੇ ਆਨੰਦ ਪੈਦਾ ਹੁੰਦਾ ਅਸਰ ਦੇ ਵਿੱਚ आनंद आनंद सबको हैं परनाथपुर उठे जाने शब्द गुरु तो उन्होंने जाने जाने आनंद सबको गुरु से इन्हें भी जाने शब्द गुरु तो मान लिया बाकी ज्यादा वो तो जाने हैं ਇਹ ਆ ਵੀ ਲੋਕਾਂ ਤੋਂ ਸੁਣਿਆ ਸਾਰੇ ਆਨੰਦ ਆਨੰਦ ਸਭ ਕੋ ਕਹਿੰਦੇ ਹੌਨੋ ਤੋਂ ਸੁਣਿਆ ਵੀ ਇਹ ਇਹ ਬਾਹਰ ਜਿਹੜੇ ਸੰਤ ਸੀ ਉਸ ਬੜੇ ਸਿੱਖਿਆ ਦੇਣ ਵਾਲੇ ਹਾ ਤਾਂ ਉਹਨਾਂ ਤੋਂ ਸੁਣਿਆ ਅਸੀਂ ਆਨੰਦ ਕੀ ਹੁੰਦਾ ਉਹ ਤਾਂ ਕਹਿੰਦੇ ਆਨੰਦ ਆਨੰਦ ਸਭ ਕੋ ਕਹਿੰਦੇ ਸਾਰੇ ਕਹਿੰਦੇ ਸੀ ਇਹ ਉਹ ਆਨੰਦ ਦੇਸੀ ਜਿਹੜੇ ਬਾਹਰ ਕਹਿੰਦੇ ਸੀ ਉਹ ਸਿੱਖਿਆ ਨਹੀਂ ਸੀ ਜਿਹੜੀ ਬਾਹਰੋਂ ਮਿਲਦੀ ਸੀ ਅੱਜ ਅਸੀਂ ਕੀ ਹੋ ਸਿੱਖਿਆ ਨਹੀਂ ਹੈ ਜਿਹਨਾਂ ਤੋਂ ਬਾਹਰੋਂ ਮਿਲਦੀ ਹੈ ਜੋ ਸਕੇ ਹੁਣ ਨਹੀਂ ਤਾਂ ਹੋਈ ਨਹੀਂ ਸਿੱਖ ਪੈਗਾ ਹੁੰਦੇ ਜਾਏ ਜੋ ਪਿੱਛੇ ਸੀਗੇ ਕੋਈ ਜੋ ਕਿਉਂ ਨਹੀਂ ਰਹੇ ਡੁਪਲੀਕੇਸੀ ਹੋ ਗਈ ਪ੍ਰਚਾਰ ਦੀ ਡੁਪਲੀਕੇਸੀ ਹੋ ਗਈ ਬੀਜ ਡੁਪਲੀਕੇਟ ਹੋ ਗਿਆ ਡੁਪਲੀਕੇਟ ਬੀਜ ਹੈ ਤਾਂ ਫਸਲ ਡੁਪਲੀਕੇਟ ਹੈ ਉਹਨੂੰ ਪੇੜ ਵੀ ਡੁਪਲੀਕੇਟ ਤੇ ਫਲ ਵੀ ਡੁਪਲੀਕੇਟ ਪ੍ਰਚਾਰ ਜੜ ਡੁਪਲੀਕੇਟ ਹੈ ਸਭ ਕੁਝ ਡੁਪਲੀਕੇਟ ਹੋ ਗਿਆ ਜੜਟ ਕੀ ਹੈ ਜੜ ਵੀ ਡੁਪਲੀਕੇਟ ਜਗ ਰਿ ਹੋ ਗਈ ਹਾਂ ਜੀ ਸੁਣ ਸੁਣ ਆਨੰਦ ਕਰੇ ਪ੍ਰਭ ਗੱਜਾ ਸੁਣ ਸੁਣ ਆਨੰਦ ਕਰੇ ਫੇਰ ਸੁਣ ਕੇ ਆਨੰਦ ਹੁੰਦਾ ਤੁਰਕੀ ਬਣ ਜੇ ਸ਼ਬਦ ਗੁਰੂ ਉੱਤਰ ਪ੍ਰੰਤਟ ਹੁੰਦਾ ਫੇਰ ਗੱਜਦਾ ਸੱਚ ਫੇਰ ਬੋਲਦਾ ਪ੍ਰਭ ਗੱਜਾ ਉਹ ਪ੍ਰਾਵੇ ਆ ਫਿਰ ਗੁਰਦੇਵ ਜਿਹੜਾ ਬੋਲਦਾ ਗੁਰ ਗੁਰਬਾਣੀ ਹੈ ਪ੍ਰਾਵ ਖੁਦ ਗੱਜਦਾ ਇਹ ਹੈ ਇਹ ਸ਼ਕਤੀ ਉਹ ਸ਼ਕਤੀ ਹੈ ਜਾਂ ਸ਼ਕਤਾ ਸੀ ਮਾਰੇ ਕਰੂ ਮਾਰੇ ਪੈ ਵਗਾ ਫੇਰ ਮਾਰ ਕਰਦਾ ਸੱਚ ਫੇਰ ਸ਼ੇਰ ਵਾਂਗੂ ਮਾਰ ਕਰਦੇ ਵਗ ਤੇ ਸ਼ੇਰ ਜਾ ਪੈਂਦਾ ਸਾਰੇ ਪਖੰਡਵਾਦ ਤੇ ਜਾ ਪੈਂਦਾ ਦੁਨੀਆ ਦੇ ਕੱਲ੍ਹੋ ਹੀ ਕੱਲ੍ਹਾਈ ਦੁਨੀਆ ਦੇ ਪਖੰਡਵਾਦ ਤੇ ਜਾ ਪੈਂਦਾ ਜਿਵੇਂ ਸ਼ੇਰ ਇਹ ਨਹੀਂ ਦੇਖਦਾ ਪੁਰੇ ਮਿਰਕ ਨੇ ਚਾ 12 ਸੋ ਕਹਿੰਨੇ ਇਹ ਆਓ ਜੇਵਰੇ ਨੇ ਚੂਹੇ ਬਾਹਰ ਗੁਰੂ ਪੁਰਗੜ ਖਲਗਰਾ ਮਤ ਉਹ ਵਗ ਇਹ ਵਗ ਆਇਆ सारा ही ਉਹਦੇ ਵਾਸਤੇ ਜੋ ਵਿਚਾਰੇ ਕਾਬੂ ਜੋ ਉਹਦੇ ਨੇ ਜ਼ਮੀਂਦਾ ਦਾ ਕਾਬੂ ਚੁੱਕਣ ਵਾਲਾ ਵਗ ਹੁੰਦਾ ਉਹ ਸਿਰਫ ਸ਼ਰੀਰ ਦਾ ਤ੍ਰਿਪਤੀ ਕਰ ਲੈਣੇ ਵਾਲੇ ਸ਼ਰੀਰ ਦੀ ਤ੍ਰਿਪਤੀ ਕਰਨ ਨੂੰ ਜੁੜਿਆ ਹੋਇਆ ਵਗ ਵਾਗਦੀ ਖੁਰਾਕ ਬਾਹਲੇ ਸਰੀਰ ਵਾਲੀ ਖੁਰਾਕ ਹੈ ਆਤਮਾ ਖਰਾਬ ਨਹੀਂ ਵਗਦੀ ਹੁੰਦੀ ਜਿਹੜੇ ਰੋਟੀਆਂ ਪੂਰਾ ਤਾਲ ਵਗਦਾ ਸਾਰੇ ਹੋਰ ਕੀ ਹੈ ਆਪ ਪਛਾਣ ਧਰਤੀ ਨਾਲ ਧਰਤੀ ਦੇ ਜਿਹੜੇ ਹੈ ਉਹ ਵਗਦਾ ਸਾਰਾ ਗੱਲ ਕੁਝ ਕਹੀ ਸੀ ਛੇਰ ਦੀ ਕਹੀ ਸੀ ਪਰ ਗੱਲ ਤਾਂ ਕੁਝ ਹੋਰ ਸੀ ਛੇਰ ਤਾਂ ਪਤਾ ਹੀ ਹੈ ਹਾਂਜੀ ਜੇ ਜੇ ਸ਼ਬਦ ਅਨੰਦ ਪਜਾ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ ਫਿਰ ਗੱਜਦਾ ਫਿਰ ਬੁੱਕਦਾ ਬਨਮੁਖ ਬੁੱਕਣਾ ਜਾਣੀ ਫਿਰ ਸ਼ੇਰ ਬੁੱਕਦਾ ਬਨਮੁਖ ਬੁੱਕਣਾ ਨਹੀਂ ਜਾਂਦਾ ਵਗਦੇ ਵਗਦੇ ਵਿੱਚ ਕੋਣ ਬੁੱਕਦਾ ਅਸੇ ਤਾਂ ਕੋਈ ਬੁੱਕਦਾ ਨਹੀਂ ਉਹ ਤਾਂ ਮੈਂ ਮੈਂ ਕਰਦੇ ਨੇ ਸਾਰੇ ਜਿਹਨੂੰ ਪੈ ਜਾਂਦਾ ਉਹ ਹੀ ਚੀਜ਼ ਲਾਉਦਾ ਹੀ ਕੋਲਦਾ ਜੇ ਲੁ ਪੈ ਜਾਂਦਾ ਹੋਵੇ ਠੀਕ ਠੀਕੜਾ ਬਹਿ ਜਾਂਦਾ ਉਹ ਹੀ ਰੋਹੀ ਬੋਲਦਾ ਹੋਈ ਪ੍ਰਗਟੇ ਗੋਪਾਲ ਮਹਾਂਦ ਦੇ ਮਾਥੇ ਨਾਨਕ ਉਦਰੇ ਤਿੰਕੇ ਸਾਸਤ ਕਲਬ ਆਇਆ ਹੁਣ ਮਹਾਂਤਲਬ ਇਥੋਂ ਬਣਿਆ ਹੋਇਆ ਇਹ ਮਹਾਂਤਲਬ ਬਣਿਆ ਹੈ ਮਹਾਂਤਲਬ ਆਇਆ ਵਾਹ ਅੰਤ ਵਾਹ ਅੰਤ ਜਿਹੜਾ ਰਾਮ है, ਵਿੱਚ ਪਿਆ ਹੈ ਜਦ ਤਾ ਉਹਦਾ ਐਂਡ ਹੋਇਆ ਰਾਮ ਗਰਬ ਸਭ ਤੋਂ ਵੱਡਾ ਅੰਤ ਇੱਕ ਹੁੰਦਾ ਹੈ ਦੇਹਾਂਤ ਤੇ ਕੈਵਹਾਂਤ ਦੋ ਲਫ਼ਜ਼ਾ ਹੈ ਇਹ ਕਹਿੰਦੇ ਦੇਹਾਂਤ ਹੋ ਗਿਆ ਦੇਹਾਂਤ ਹੋ ਗਿਆ ਜਿਹੜਾ ਸਰੀਰ ਮਿਲਿਆ ਉਹ ਤਾਂਤ ਹੋਇਆ ਗਰਮ ਜੋ ਵਾਸ ਹੀ ਗਿਆ ਜਿਦੋਂ ਜਪੜਵਾੜ ਨਹੀਂ ਛੁੱਟਿਆ ਹੈ ਪਰਿਆ ਜਰੂਰ ਹੈ ਇਹ ਦੇਹਾਂਤ ਉਹ ਲੈਣੀ ਕੋਲ ਸੀ ਉਸ ਵੇਲੇ ਜਿਹੜੀ ਦੇਹ ਸੀ ਦੇ ਉਹ ਵਿਦੇਗ ਹੈ ਉਹ ਹੈ ਤਾਂ ਵਿਦੇਹੀ ਸੀ ਪਰ ਦੇਹੀ ਬੰਦੇ ਨੇ ਨਾ ਉਹ ਸਰੀਰ ਦਾ ਅੰਤ ਹੋਇਆ ਜਿਹੜਾ ਟਾਈਮ ਪੀਰੀਅਡ ਸੀ ਇੱਕ ਪੀਰੀਅਡ ਦਾ ਅੱਜ ਦੀ ਕਲਾਸ ਹੈ ਜਿਹੜੀ ਜਦੋਂ ਸਕੂਲ ਦੇ ਵਿੱਚ ਆਇਆ ਅੱਜ ਦਾ ਮਤਲਬ ਹੈ ਜਨਾ ਕਿ ਪੜਨਾ ਸੀ ਉਹ ਦਾ ਅੰਤ ਹੋਇਆ ਕੱਲ ਨੂੰ ਫਿਰ ਕਲਾਸ ਹੋਵੇਗੀ ਜੁਵਾਦਰ ਫਿਰ ਸਕੂਲ ਨੂੰ ਦੋ ਜਨਮ ਦਾ ਸਕੂਲ ਹੈ ਜਿਹੜਾ ਫੁੱਲ ਨਾ ਉਹ ਪਹਿਲੇ ਦਿਨ ਦਾ ਐਂਡ ਹੋਇਆ ਸਰ ਦੇ ਹਾਂ ਦੇ ਹਾਂ ਦੇ ਹੀ ਹਾਂ ਤੇ ਇਹ ਬਾੰਤ ਗਿਆ ਬਾੰਤ ਗਿਆ ਅਗਲੀ ਦੇਹੀ ਬਣਣੀ ਹੋਣੀ ਜਦੋਂ ਅਗਲਾ ਜਨਮ ਨਹੀਂ ਬਣਨਾ ਮਹਾਂਤ ਤੋ ਬਣਾੰਤ ਨਹੀਂ ਕੋਈ ਸੰਤ ਹੋ ਗਿਆ ਹੁਣ ਜਿਉਂਦਾ ਮਰਦਾ ਕੰਮ ਤੂੰ ਦਾ ਜੇ ਜੀਵਨ ਵਿੱਚੇ ਮਰ ਜਾਂਦਾ ਨਾ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਬੜਿਆ ਭਰਿਆ ਹੋਇਆ ਜਾਂਦਾ ਹੁੰਦਾ ਜਲ ਵਰਕੇ ਜਾਂਦਾ ਹੁੰਦਾ ਮਹੰਤ ਸਾ ਫਿਰ ਮਰਣਾ ਨਾ ਹੋਈ ਹੋਈ ਐਸੇ ਮੰਨੇ ਜੋ ਮਰੇ ਬਹੁਤ ਬੋਲਣਾ ਮਰਦਾ ਉਹਨੂੰ ਮਹਾਂਤ ਕਹਿ ਮਹੰਤ ਜਿਸ ਦਾ ਹੋ ਜਾਏ ਜਿਹਨੂੰ ਜੀਵਨ ਮੁਕਤ ਅਵਸਥਾ ਪ੍ਰਾਪਤ ਹੋ ਜਾਵੇ ਉਹ ਦੇ ਗੋਪਾਲ ਮੱਥੇ ਤੇ ਪ੍ਰਗਟ ਹੋ ਜਾਂਦਾ ਹੈ ਹਿਰਦੇ ਚ ਉਹਦੇ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਇਹਦੇ ਚ ਸ਼ਬਦ ਗੁਰੂ ਦਾ ਘਰ ਨਹੀਂ ਆ ਮਹਾਂ ਤੇ ਲਿਖਿਆ ਹੈ ਵੈਸੇ ਪ੍ਰਗਟੇ ਗੋਪਾਲ ਮਹਾਂ ਦੇ ਘਰ ਵਾਸੇ ਹਾਂ ਗੋਪਾਲ ਪ੍ਰਗਟ ਹੋ ਜਾਂਦਾ ਹੈ ਠੀਕ ਹੈ ਗੋਪਾਲ ਪ੍ਰਗਟ ਪਰਗਟਲੇ ਬੋਬਾਲ ਕੋਬਾਲਾ ਜਨਮ ਹੋ ਜਾਂਦਾ ਇੱਥੇ ਮਹਾਨ ਦੇ ਮੱਥੇ ਹਾਂ ਮਹਾਨ ਦੇ ਮੱਥੇ ਜੀ ਦਾ ਮਹਾਨ ਤਾਂ ਹੋ ਗਿਆ ਜੀ ਰਾਮ ਗਰਭ ਤੋਂ ਜਨਮ ਨਹੀਂ ਲੈਣਾ ਉਹਦੇ ਹਿਰਦੇ ਮਾਥਾ ਮਾਥਾ ਹਿਰਦੇ ਨੂੰ ਕਹਿੰਦੇ ਪਾਥਾ ਹਿਰਦਾ ਸੱਡ ਅਸਲੇ ਜੀ ਦਾ ਹਿਰਦਾ ਮਾਥਾ ਹੁੰਦਾ ਮਰਮਥਾਈ ਹੁੰਦਾ ਬਰੇ ਬੂਰੇ ਆ ਬਰੇ ਗਾਲ ਜਿਹਾ ਮਾਏ ਬੂਰੇ ਆ ਪਰ ਜਿਹੜੇ ਗੋਪਾਲ ਮਹਾਂਤ ਦੇ ਮੱਥੇ ਨਾਨਕ ਉਧਰੇ ਤਨਕੇ ਸਾਥੇ ਨਾਨਕ ਕਹਿੰਦਾ ਉਧਰੇ ਤਨਕੇ ਸਾਥਾ ਉਸ ਆਦਮੀ ਦੇ ਨਾਲ ਜੁੜ ਕੇ ਸੰਸਾਰ ਤੋਂ ਉਧਾਰ ਹੋ ਸਕਦਾ ਕਿਹਦੀ ਸੰਗਤ ਕਰਨੀ ਆ ਕਿਹਦੀ ਨਹੀਂ ਕਰਨੀ ਉਹਦਾ ਰਿਜ਼ਲਟ ਦੱਸਿਆ ਇੱਥੇ ਸਾਧ ਉਤਮ ਸ਼ਲੋਕ ਸਾਧ ਕੇ ਜਿਹੜੇ ਬਚਰ ਸੀ ਉਹ ਸਾਧ ਕੌਣ ਹੈ ਉਹ ਸ਼ਲੋਕ ਉਤਮ ਕਿਉਂ ਹੁੰਦੇ ਨੇ ਇਹ ਸਾਰੀ ਇੱਥੇ ਤੱਕ ਪੂਰਾ ਪੜਾ ਹੋ ਗਿਆ ਪਿਛਲੇ ਸਾਰਾ ਸਮਾਪਤ ਕਰਤਾ ਇਥੇ